के लोक तीजा ब्रह्म बिन्दै तिसदा ब्रहमत रहै एक शब्द लिबलाए नव निधि 18 सिद्धि पीछे लगियां फिरै जो हर हृदय सदा वसाई. जेडा अपने ब्रह्म न मूल न जुड्या रहंदा ओदा ब्रह्मत भजदा ਉਦਾਈ ਗੋਕਾਰ ਨਹੀਂ ਹੁੰਦਾ ਉਹੀ ਕਾਲਾ ਹੋਣ ਤੋਂ ਬਚਦਾ ਉਹੀ ਮਲੀਨਤਾ ਮਾਇਆ ਦੀ ਮਲੀਨਤਾ ਤੋਂ ਸੰਸਾਰ ਤੋਂ ਉਹੀ ਬਚ ਕੇ ਰਹਿ ਸਕਦਾ ਮਾਇਆ ਤਾਂ ਕਾਜਲ ਦੀ ਕੋਠੜੀ ਹੈ ਇਹਦੇ ਚ ਅੰਨੇ ਪਏ ਹੋਏ ਸਾਰੇ ਕਾਜਲ ਤੋਂ ਵੀ ਕੋਠੜੀ ਚ ਬਚਣ ਵਾਸਤੇ ਆਪਣਾ ਜੁੜ ਕੇ ਰਹਿਣਾ ਜਿਹੜਾ ਮੂਲ ਨਾਲ ਜੁੜਿਆ ਰਹੂ ਉਹ ਮਲੀਨਤਾ ਨਹੀਂ ਲੱਗੂਗੀ ਜਿਹੜਾ ਮੂਲ ਨੂੰ ਨਾ ਜੂਗਾ ਉਹ ਕਾਜ ਦੀ ਕੋਸ਼ੜੀ ਤੇ ਉਹ ਕਾਲਾ ਹਜੂਰ ਬੁਲੇ ਤਾਂ ਇਹ ਮੇਨ ਹਜੂਰ ਦੀ ਗੁੱਦੀ ਇੱਕੋ ਸ਼ਬਦ ਲੈ ਬਲਾਇਆ ਕਿ ਤੇ ਸ਼ਬਦ ਨਾਲ ਗੁਰਬਾਣੀ ਨਾਲ ਗੁੜਿਆ ਹੈ ਇੱਕ ਸ਼ਬਦ ਲੈ ਬਲਾਇਆ ਹਾਂ ਗੁਰਬਾਣੀ ਨਾਲ ਗੁਰਬਾਣੀ ਦਾ ਜਿਹੜਾ ਉਪਦੇਸ਼ ਇੱਕੋ ਹੀ ਹੈ ਸਾਰਿਆਂ ਦਾ ਜਿੰਨੇ ਵੀ ਗੁਰਗੁਰ ਸਾਹਿਬ ਦੇ ਵਿੱਚ ਪੜਤ ਨੇ ਗੁਰੂ ਨੇ ਘਟ ਨੇ ਸਾਰਿਆਂ ਦਾ ਇੱਕੋ ਹੀ ਉਪਦੇਸ਼ ਹੈ ਇੱਕ ਸ਼ਬਦ ਨਾਲ ਜੋ ਵੀ ਦੇ ਸੇ ਕੋਈ ਗੱਲ ਰੱਖਦੇ ਹਰ ਕਦੀ ਨਹੀਂ ਆਇਆ ਇਹ ਇਸ ਉਪਦੇਸ਼ ਨਾਲ ਜਿਹੜਾ ਜੁੜਿਆ ਰਹੂਗਾ ਉਹਦਾ ਹੀ ਫਰਮਤ ਬਚ ਸਕਦਾ ਹੈ ਆਪਣੇ ਮੂਲ ਨਾਲ ਜੁੜਿਆ ਰਹਿ ਸਕਦਾ ਜੇ ਕਿਤੇ ਮਾਇਆਵਲ ਤੇ ਅੰਝ ਲੈ ਗਿਆ ਦੁਨੀਆ ਦੀ ਵਿੜਿਆਈ ਵੱਲ ਤੇ ਅੰਝ ਗਿਆ ਜਾਂ ਹੋਰ ਕੋਈ ਗੱਲ ਇਤਹਾਸ ਵੱਲ ਧਿਆਨ ਚਲੇ ਗਿਆ ਇਤਹਾਸ ਨੂੰ ਫੋੜਣ ਲੱਗ ਗਿਆ ਬਾਚਣ ਲੱਗ ਗਿਆ ਧਿਆਨ ਹਟ ਗਿਆ ਗੁਰਬਾਣੀ ਤੋਂ ਸਾਵੀ ਯੋਗ ਨੂੰ ਕਹਾਂ ਜੇ ਬ੍ਰਹਮ ਤੁਰੀਣਾ ਮੋੜ ਲੱਗਦਾ ਤਾਂ ਇਹ ਪਰਤੇ ਗੁਰ ਕਾਇਆ ਸਾਕਾਰ ਕਮਾਵੋ ਇੱਕ ਸ਼ਬਦ ਲਿਵਲਾਏ ਆਇ ਤੇ ਸ਼ਬਦਾਂ ਨਾਲ ਲਿਵਲਾ ਕੇ ਰੱਖੇ ਗੁਰਬਾਣੀ ਨਵ ਨਿੱਧੀ 18 ਸਿੱਧੀ ਪੁੱਛੇ ਜੋ ਹਰ ਹਿਰਦੈ ਸਦਾ ਵਸਾਈ ਜੇਰਾ ਗੁਰਬਾਣੀ ਦੇ ਵਿਚਾਰ ਚ ਗੁਰਬਾਣੀ ਵਿਚਾਰਦਾ ਰਹੂਗਾ ਉਹ ਆਪਣੇ ਮੂਲ ਨਾਲ ਜੁੜਿਆ ਹਰ ਹਿਰਦੇ ਚ ਉਹਦੇ ਵਸਿਆ ਰਹੂਗਾ ਤੇ ਉਹਦੇ ਨੰਦ ਤੀ 118 ਸਦੀਆਂ ਰਹਿੰਦੀ ਹੈ ਦੁਨੀਆ ਦੀਆਂ ਵਡਿਆਈਆਂ ਤੋਂ ਪਿੱਛੇ ਪਿੱਛੇ ਦੂਰੀ ਰਹਿੰਦੀ ਹੈ ਤੇ ਉਹਨੂੰ ਜ਼ਰੂਰ ਤੇਰੀਆਂ ਦੇ ਪਿੱਛੇ ਭਜਣ ਦੀ ਬਾਰੇ ਸੋਚਣ ਦੀ ਲੋੜ ਨਹੀਂ ਹਾਂਜੀ ਤੇ ਇੱਥੇ ਪਹਿਲੀ ਵਾਰ ਇਹ ਅੱਖਰ ਨਿਧੀ ਪੂਰੀ ਗੁਰਬਾਣੀ ਚ ਇੱਕੇ ਜਗ੍ਹਾ ਆਉਂਦਾ ਜੀ ਤੇ ਇੱਥੇ ਹਾਂਜੀ ਹਾਂਜੀ ਇੱਥੇ ਨਿਧੀ ਕਹਿੰਦਾ ਮਤਲਬ ਬਹੁਵਚਨ ਹੈ ਜੀ ਇਹ ਬਹੁਵਚਨ ਹੈ ਨਿਧੀ ਸਿਆਰੀ ਨਾਲ ਆਉਣਾ ਫਿਰ ਹਾਂਜੀ ਤੇ ਜਿੱਥੇ ਫਿਰ ਸਿਆਰੀ ਨਾਲ ਲਿਖ ਕੇ ਇਹਦੇ ਨਾਲ ਨਾ ਲਾਉਂਦਾ ਉੱਥੇ ਫਿਰ ਆਪਾਂ ਨੋਂ ਨਹੀਂ ਨਾ ਅਰਥ ਕਰ ਸਕਦੇ ਉਹ ਇੱਕ ਬਚਨ ਜਾਨੇ ਤੇ ਇੱਕ ਬਚਨ ਨਾ ਹੁਣ ਸਾਫ ਨੂੰ ਪਤਾ ਨਹੀਂ ਕਿਉਂ ਕਰੀ ਕੇ ਨਾਲੇ ਉਹ ਕਹਿੰਦਾ ਵੀ ਸਿਆਰੀ ਨਾਲ ਇੱਕ ਬਚਨ ਬਣਦਾ ਇਸ ਤਰੀ ਲੇ ਨਾਲੇ ਆਰਥਨ ਉਹ ਨਹੀਂ ਦੀ ਕਰੀ ਜਾਂਦਾ ਫਿਰ ਇਹਦੀ ਉਹ ਅਸਲ ਤੇ ਨਕਲ ਮਾਰਤੀ ਉਹਨੇ ਕਿਹਾ ਇਹਨਾਂ ਦੀ ਗੱਲ ਧਿਆਨ ਰੱਖਿਆ ਉਹ ਤਾਂ ਨਾ ਪਾਇਆ ਜੀ ਸਾਫ ਨੂੰ ਟੀਕਾ ਕੀਤਾ ਜੀ ਸਾਫ ਨੂੰ ਟੀਕਾ ਇੱਕ ਕਦਮ ਵੀ ਚੱਲੇਗਾ ਧਿਆਨ ਦੇ ਨਾਲ ਤੋਂ ਜਿੱਥੇ ਚੱਲਣਾ ਚਾਹੀਦਾ ਸੀ ਉੱਥੇ ਨਹੀਂ ਗਿਆ ਚੱਲਿਆ ਫੇਰ ਬਾਕੀ ਕਿੱਲੇ ਰਹੀ ਸਦਾ ਚੱਲਣਾ ਤਾਂ ਇੱਥੇ ਚਾਹੀਦਾ ਸੀ ਕਿਤੇ ਫਾਤਾ ਵਿਚਾਰ ਧਾਰਾ ਬਦਲਦੀ ਐ ਦੂਰ ਨੌਂ ਨਿਧੀਆ ਨਮਰਿਤ ਦਾ ਅਰਥ ਜਿੱਥੇ ਹੋਇਆ ਤੇ ਬਹੁਤ ਠੀਕ ਹੈ ਉਹ ਅਰਥਾਂ ਦਾ ਕੋਪ ਲਿਖਾ ਜਗ੍ਹਾ ਜਿੱਥੇ ਨੌਂ ਦੀ ਗੱਲ ਆ ਰਹੀ ਗੁਰਬਾਣੀ 'ਚ ਹਾਂ ਠੀਕ ਹੈ ਜੀ ਤੇ ਇੱਥੇ ਸਿੱਧੀਆਂ ਵੀ ਸੁਧੀਆਂ ਹੋ ਗਈਆਂ ਪਿੱਛੇ ਲੱਗੀਆਂ ਆ ਗਿਆ ਨਾ ਜੀ ਲੱਗੀਆਂ ਤੋਂ ਵੀ ਬਹੁਵਚਨ ਬਣਦਾ ਬਹੁਵਚਨ ਫਿਰ ਨਾ ਥਾਰਾ ਕੁਝ ਬਹੁਵਚਨ ਲੱਗੇ ਕਿਰਿਆ ਵੀ ਤਾਂ ਬਹੁਵਚਨ ਲੱਗੀ ਫਿਰ ਇਹ ਆਉਂਦਾ ਜੋ ਸਦਾ ਵਸਾਈ ਜਿਹੜਾ ਹਰ ਨੂੰ ਰੱਖ ਲੈਂਦਾ ਉਹਦੇ ਪਿੱਛੇ ਲੱਗੀਆਂ ਫਿਰਦੀ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗਚਾਰ ਸਤਗੁਰ ਤੇ ਬਨਾ ਨਾਮ ਨਹੀਂ ਬਣ ਸਕਦਾ ਸਤਗੁਰ ਉਹ ਹੈ ਜਿਹੜਾ ਜੰਮਨ ਵਾਲੀ ਦਾ ਘਟਿਆ ਹੋਇਆ ਸਤਗੁਰ ਤੇ ਨਾਮ ਪਾਇਆ ਜਾਵੇ ਸਤਗੁਰ ਕਦੋਂ ਕਿਸ ਨੂੰ ਨਾਮ ਵਾਲਛਾਈ ਨਹੀਂ ਮਿਲਿਆ ਸਤਗੁਰ ਤੇ ਹੀ ਪਾਇਆ ਜਿਹਨੇ ਪਾਇਆ ਸਤਿਗੋ ਤੇ ਨਾਮ ਬਾਝਾ ਜਾਏ ਬੁੱਝੋ ਕਰ ਵਿਚਾਰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਬੁੱਝ ਲੋ ਜਿਹਨੂੰ ਨਾਮ ਉਹ ਜਿਹਨੂੰ ਨਾਮ ਮਿਲਿਆ ਉਹਨੇ ਮੁਕਤੀ ਦੀ ਗੱਲ ਵੀ ਦੱਸੀ ਹੈ ਵੀ ਮੁਕਤਾ ਮਿਲਦੀ ਹੈ ਜਿਹਨਾਂ ਦੱਸੀ ਨਹੀਂ ਨਾ ਗੱਲ ਉਹਨਾਂ ਨੂੰ ਮਿਲਿਆ ਹੀ ਨਹੀਂ ਉਹ ਮੁਕਤੀ ਸਮਝਾਈ ਹੈ ਲੋਕਾਂ ਨੂੰ ਵੀ ਆਏ ਮੁਕਤੀ ਮਿਲਦੀ ਹੁੰਦੀ ਹੈ ਜਿਹਨੂੰ ਪ੍ਰਾਪਤ ਹੋਈ ਹੈ ਜਿਹੜੇ ਕਹਿੰਦੇ ਨੇ ਮਰੇ ਤੋਂ ਮੁਕਤ ਮਣਨੀਆਂ ਦਾ ਮਤਲਬ ਆ ਉਹਨਾਂ ਨੂੰ ਮੁਕਤੀ ਮਿਲ ਜੂ ਨਹੀਂ ਉਹਨਾਂ ਨੂੰ ਜੋ ਜਿਉਨਰ ਉਹਨੇ ਇਹਨੂੰ ਮੁਕਤੀ ਵੀੜੀ ਉਹਨੂੰ ਮੁਕਤੀ ਵੀੜੀ ਹੋਈ ਨਹੀਂ ਕਰੂਗੀ ਠੀਕ ਹੈ ਜੀ ਉਹਨੂੰ ਮਿਲ ਲਈ ਆ ਮੁਕਤੀ ਦੀ ਨਾਮ ਮਿਲ ਗਿਆ ਉਹਨੂੰ ਮੁਕਤੀ ਮਿਲ ਗਈ ਜਿਨੂੰ ਨਾਮ ਮਿਲ ਗਿਆ ਉਹਨੇ ਸਮਝਾ ਵੀ ਦਿੱਤਾ ਮੁਕਤੀ ਤੇ ਫਰਮਾਨੀ ਨਾਨਕ ਪੂਰੇ ਭਾਗ ਸਤਗੁਰ ਮਿਲੇ ਸੁਖ ਪਾਏ ਜੁਗ ਚਾਰ ਪੂਰੇ ਸਤਗੁਰਪੈ ਨਾਮ ਪਾਇਆ ਜਾਊਗਾ ਸਤਗੁਰਪੈ ਆਪਣਾ ਲਾਪ ਇਹ ਪੂਰੇ ਭਗ ਦੇ ਛੰਡੀ ਜਿਹਨੂੰ ਸਤਗੁਰ ਦਾ ਮਲਾਕ ਹੋ ਗਿਆ ਉਹਨੂੰ ਪੂਰੇ ਭਗ ਉਹਦੇ ਹੈ ਗਿਆ ਨੇ ਸਤਗੁਰ ਮਿਲੇ ਜੋ ਵਿਚਾਰ ਸੁਖੇ ਹੁੰਦਾ ਸਰ ਉਹ 14 ਜੋਗ ਚਾਰ ਜੋਗ ਦੁਨੀਆ ਦੇ ਬਸੰਦੇ ਰਹਦੇ ਨੇ ਉਹ ਸੁਖ ਰਹਿੰਦਾ ਉਹਦੇ ਬਾਸ ਉਹਦੇ ਬਾਸ ਕੋਈ ਕਰਜੂ ਕੋਈ ਹੁੰਦਾ ਹੀ ਨਹੀਂ ਸੁਖ ਦਰਸੀ ਉਹ ਠੀਕ ਹੈ ਉਹਦਾ ਤਾਂ ਕਾਲਜ ਤਾਂ ਹੁੰਦਾ ਇੱਕ ਘੜੀ ਨਾਲ ਮਿਲਤੇ ਤਾਂ ਕਾਲਜ ਜਿਹੜਾ ਹੁੰਦਾ ਜਦ ਕੋ ਆਪਣੇ ਬ੍ਰਹਮਣੋਂ ਟੁੱਟਦਾ ਹਰ ਹੇਲ ਬੇਕਰ ਜਦੋਂ ਗਾਇਬ ਹੁੰਦਾ ਨੂੰ ਸੋਚਣ ਲੱਗਦਾ ਉਧਰ ਭਜਦਾ ਪਿੱਛੇ ਕਾਲਜ ਗਾਇਬ ਸਿੱਧੀਆਂ ਮਗਰ ਭਜਦੇ ਨੇ ਰਿੱਡੀਆਂ ਸਿੱਧੀਆਂ ਦੀ ਗੱਲ ਕਰਦਾਂ ਨਾ ਕਰ ਜੂਗੀ ਜੀਵ ਨੇ ਸਾਰੇ ਉਹ ਠੀਕ ਹੈ ਜੀ ਹਾਂਜੀ ਸਾਰਜੁਗਤਨ ਭਾਵ ਹੈ ਕਿ ਤਿੰਨ ਤਾਂ ਮਾਇਆ ਚ ਹੋਗੇ ਇੱਕ ਸੱਚ ਹੋਗੇ ਹਾਂਜੀ ਆ ਇੱਕ ਵਾਰ ਉਹ ਸੱਚਖੰਡ ਤੇ ਸੱਚ ਹੋਗਾ ਬਸ ਠੀਕ ਹੈ ਜੀ ਉਹ ਇੱਥੇ ਵੀ ਸੁਖ ਚੈਨ ਸੱਚਖੰਡ ਦਾ ਸੁਖ ਚ ਰਹਿਣਾ ਹੀ ਹੈ ਜੀ ਉਹ ਇੱਥੇ ਵੀ ਇੱਥੇ ਦੇ ਸੁਖ ਕੋ ਆਪ ਹੀ ਹੈ ਮਨਲਾ ਤੀਜਾ ਕਿਆ ਗੱਭਰੂ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਰਤਿਆ sheetal hoye aap gaway ke ta jwana gobrua ki ki o saana bujurga hai je tam kha ta koi gal laudi o di trishna bhookh ni jandi te ve prakar naal vi chahe o bujurga vi ho gaya manmukha oda swabhav ho jae rehnda h har kade koi vi kehanda ohna kuch vi sikheya sirf ore gawaye sikheya kuch vadiyan ਕਾ ਗੱਭਰੂ ਕਾ ਬਿਰਦ ਹੈ ਮਨੁੱਖ ਕੋ ਖਾਣਾ ਜਾਏ ਤੇ ਇਸਨਾਂ ਭੁਖਣਾ ਜਾਏ ਮਨੁੱਖ ਵੀ ਇਸਨਾਂ ਭੁਖਦੀ ਜਾ ਸਕਦੀ ਠੀਕ ਹੈ ਜੀ ਕਹਿੰਦਾ ਭਾਬ ਜੀ ਕੋਈ ਉਮਰ ਦਾ ਉਹ ਬਿਲਕੁਲ ਗਿਆਨ ਦੀ ਲੋੜ ਹੈ ਅਖਿਰਸ ਪਾਸ਼ਾ ਦੀ ਕਿੰਨੀ ਉਮਰ ਹੈ ਤੁਹਾਨੂੰ ਠੀਕ ਹੈ ਗੱਭਰੂ ਕਾ ਬਿਰਦ ਹੈ ਮਾਨ ਮੁਖ ਤੇਸਨਾ ਭੁੱਖ ਨਾ ਜਾਏ ਗੁਰਮੁਖੀ ਸ਼ਬਦ ਰੱਤਿਆਂ ਸੀਤਲ ਹੋਏ ਆਪ ਗਵਾਏ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸ਼ਬਦ ਦਾ ਗੁਰਬਾਣੀ ਦਾ ਰੰਗ ਚੜਿਆ ਇਸ ਕਰਕੇ ਉਹਨਾਂ ਦਾ ਹਿਰਦਾ ਸ਼ਾਂਤ ਹੁੰਦਾ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਹੈ ਸੀਤਲ ਹੁੰਦੀ ਹੈ ਉਹਨਾਂ ਮਨ ਦਾ ਸੀਤਲ ਹੁੰਦਾ ਉਹਨਾਂ ਦੇ ਅੰਦਰ ਉਹ ਦੀ ਅਗ ਬੁਝ ਜਾਂਦੀ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਜਾਂ ਤਾਂ ਇਹਦੇ ਨੂੰ ਸੁਖ ਹੁੰਦਾ ਦੂਜੇ ਨੂੰ ਸੁਖ ਨਹੀਂ ਹੋ ਸਕਦਾ ਹੈ ਜੀ ਅੰਦਰ ਤ੍ਰਿਪਤ ਸੰਤੋਖਿਆ ਫਿਰ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਬਿਨਾਂ ਉਹਨਾਂ ਦਾ ਗੁਰਮਖਾ ਦਾ ਅੰਦਰ ਤ੍ਰਿਪਤ ਹੋ ਜਾਂਦਾ ਹੈ ਬਾਇ ਦੀ ਦੇ ਅੰਦਰ ਭੁੱਖ ਨਹੀਂ ਰਹਿੰਦੀ ਆਨੰਦ ਅਵਸਥਾ 'ਚ ਰਹਿੰਦੇ ਨੇ ਉਹ ਸੰਤੋਖ ਹੁੰਦਾ ਨੂੰ cript santokh ya ਹਾਂਜੀ ਗੁਰਮੁਖਾਂ ਦਾ ਤੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਠੀਕ ਹੈ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰੱਤੇ ਲਿਵ ਲਾਂ ਗੁਰਮੁਖ ਜੋ ਵੀ ਕੁਝ ਕਰਦੇ ਨੇ ਸੰਸਾਰ ਦੇ ਉੱਤੇ ਹੁੰਦਾ ਅੱਛਾ ਜੀ ਦਰਕਾਰ ਪ੍ਰਵਾਨ ਜੋ ਕੁਝ ਕਰ ਰਹੇ ਨੇ ਤੋਂ ਉਹਨਾਂ ਦੇ ਅੰਦਰ ਸੇਖਾ ਕੋ ਖੈ ਉਹ ਪਾਣੀ ਚ ਚੱਲਦੇ ਨੇ ਪ੍ਰਵਾਨ ਕੀ ਹੈ ਜਿਹੜਾ ਪਾਣੀ ਚੱਲੂਗਾ ਉਹ ਆਪੇ ਪ੍ਰਵਾਨ ਜਿਵੇਂ ਪਰਮੇਸ਼ਰ ਚਲਾਉਂਦਾ ਉਹਨੇ ਚੱਲਦੇ ਨੇ ਉਹ ਕਰਾਉਂਦਾ ਉਹੀ ਕਰਦੇ ਨੇ ਇਹ ਸਾਡੇ ਉਹ ਦਰਗਾਹ ਦੇ ਪਰਵਾਣੇ ਹੁੰਦੇ ਉਹਨਾਂ ਦਾ ਸਭ ਕੁਝ।ਔੜੀ ਹਰਨਾਮ ਧਿਆਇਂਦੇ ਤਿੰਨ ਦਰਸ਼ਨ ਪਿੱਖਾ। ਮੈਂ ਉਹਨਾਂ ਦੇ ਕੁਰਬਾਨ ਜਾਣ। ਜਿਹੜੇ ਗੁਰਮੁਖ ਨੇ ਸਿੱਖਨੇ ਜਿਹੜੇ ਸਿੱਖ ਨੇ ਗੁਰਮੁਖ ਬਣ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਲਈ ਜਿਨ੍ਹਾਂ ਮੰਨ ਲਿਆ ਉਹ ਦੋਸਤਾਂ ਦੇ ਕਿਤੇ ਲੱਗ ਗਏ ਰਸਤੇ ਗੁਰੂ ਮੰਤਰ ਦੇ ਨਾਲ ਕਰਵਾਣ ਦੇ। ਉਹਨਾਂ ਨੇ ਸਤਗੁਰ ਦਾ ਦਰਸ਼ਨ ਵੀ ਕਰ ਲਿਆ। 15 ਜੀ। ਆਪਣਾ ਸੱਤ ਸਾਥੀ ਕੋ ਖਾਲੀ ਕੋਈ ਨਹੀਂ। ਉਹਨਾਂ ਦਾ ਆਪਣਾ ਜਿਹੜਾ ਮੂਰ ਹੈ ਉਹ ਹੀ ਬਣ ਗਿਆ। ਅੰਤਰਾਤਮਾ ਜਿਵੇਂ ਲੈਣ ਅਸੇ ਜਿਵੇਂ ਉਹ ਅੰਤਰਾਤਮਾ ਕਰਕੇ ਸਤਗੁਰਾਂ ਨਾਲ ਮਿਲੇ ਹੋਏ ਹੋ। ਇਸ ਕਰਕੇ ਉਹਨਾਂ ਦੀ ਨੰਤਰਾਸ ਉਹ ਸਤਗੋਤਿ ਆਤਮਾ ਬਰਤੀ ਹੋ ਜਾਂਦੀ ਜੋ ਹਰ ਨਾਮ ਧਿਆਇਂ ਦੇ ਤਿੰਨ ਦਰਸ਼ਨ ਪਿਖਾ ਜਿਹੜੇ ਹਰ ਨਾਮ ਚ ਭੌਣ ਉਹਨਾਂ ਦੇ ਆਤਮ ਦਰਸ਼ੀ ਆਤਮ ਨਾਮ ਦਾ ਦਰਸ਼ਨ ਹੋ ਜਾਂਦਾ ਉਹਨਾਂ ਨੂੰ ਉਹ ਤੁਰਕੀ ਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਤੁਰਕੀ ਬਾਣੀ ਫਰਗਟ ਹੋ ਜਾਂਦੀ ਹੈ ਉਹਨਾਂ ਦੀ ਸੁਰ ਤੋਂ ਸ਼ਬਦ ਨਾਲ ਜੁੜ ਜਾਂਦੀ ਹੈ ਜਿਹੜਾ ਤੁਰਕੀ ਬਾਣੀ ਕਹਿੰਦੇ ਨੇ ਅਰੋਧਾ ਦਰਸ਼ਨ ਹੋ ਜਾਂਦਾ ਠੀਕ ਹੈ ਜੀ ਸੁਣ ਕੀ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਕੋਈ ਕੀਰਤਨ ਗੁਰਬਾਣੀ ਨੂੰ ਹਰ ਗੁਣ ਰਵਾ ਹਰ ਕੇ ਗੁਣ ਸਾਰੇ ਧਾਰਨ ਕਰ ਲਵ ਜਿਹੜੇ ਗੁਰਬਾਣੀ ਨੂੰ ਹੁੰਦੇ ਨੇ ਸਮਝੇ ਨੇ ਮਨ ਨੇ ਉਹਨਾਂ ਦੀ ਗੁਰਬਾਣੀ ਵਾਲੇ ਸਾਰੇ ਗੁਣ ਪ੍ਰਗਟ ਹੋ ਸਕਦੇ ਨੇ ਜਿਉਂ ਚਾਹਣ ਪਰ ਪਰਵਰਤ ਕਰਦੇ ਨੇ ਜੇ ਗੁਣ ਧਾਰਨ ਕਰਨੇ ਚਾਹੁੰਦੇ ਹਾਂ ਤਾਂ ਹੋ ਸਕਦੇ ਨੇ ਗੁਰਬਾਣੀ ਕਹਿੰਦੀ ਗੁਣ ਰਵਾ ਰਵਾ ਦਾ ਮਤਲਬ ਹੈ ਅੰਦਰ ਗੁਣ ਧਾਰਨ ਹੋ ਸਕਦੇ ਨੇ ਕੱਲਮਾ ਗੁਣ ਨੂੰ ਧਾਰਨ ਕਰ ਲਮਾ ਤੇ ਕਰਨਾ ਨਾ ਕਰਨਾ ਤਾਂ ਫੇਰ ਬਰੀ ਮਰਜ਼ੀ ਹੋ ਜਾਂਦਾ ਧਾਰਨ ਕਰਦੇ ਰਹਿਣਗੇ ਮੰਦੇ ਉੱਤੇ ਲੰਗਣਾ ਪਊਗਾ ਗੁਨਾਹਾਂ ਦੀ ਗੱਟਕੀ ਲੱਗਣੀ ਪਊਗੀ ਮੰਦੇ ਉੱਤੇ ਉਹਨਾਂ ਦੀ ਕੰਡੋਂ ਤੋਂ ਲਹਣੀ ਪਊਗੀ ਪਰ ਉਹਨਾਂ ਫੜਦੇ ਨਹੀਂ ਜਿਉਣਾ ਮੰਦੇ ਇੱਕ ਪੜਦੇ ਤੇ ਖੜੀ ਗੱਲ ਸਾਰੀ ਉਹ ਰਵਾਹ ਆਣਾ ਲਾਉਣਾ ਹੌਲੀ ਹਰ ਜਸ ਮਨ ਲਿਖਾਂ ਹਰ ਜਸ ਮਨ ਲਿਖਾ ਫਿਰ ਹਰ ਜਸ ਲਿਖਿਆ ਜਾਊਗਾ ਮੰਦੇ ਉੱਤੇ ਰੋਲਾ ਤੇ ਲਿਖਿਆ ਜਾਊਗਾ ਬਾਜਾ ਹਾਰਜਾਸ ਲਿਖਿਆ ਗਿਆ ਕਾਲਸ ਲੰਢੀ ਚਲੀ ਜਾਊਗੀ ਜਿੱਥੇ ਜਿੱਥੇ ਲਿਖਦਾ ਚੱਲਿਆ ਜਾਊਗਾ ਉੱਥੇ ਉੱਥੇ ਕਾਲਸ ਲੰਢੀ ਚਲੀ ਜਾਊਗੀ ਉੱਥੇ ਕੋ ਜਾਊਗਾ ਜਿੱਥੇ ਜਾਊਗਾ ਜਿਉਂ-ਜਿਉਂ ਕੁਰਬਾਨੀ ਨੂੰ ਭੰਦਾ ਚੱਲਿਆ ਜਾਊਗਾ ਤੇ ਕੋ ਮਨ ਨਰਮਲ ਹੁੰਦਾ ਚੱਲਿਆ ਜਾਊਗਾ ਆਹ ਗੱਲ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲਵਿਖ ਕ੍ਰਿਖਾ ਹਾਲਾਂਕਿ ਫਿਰ ਸੰਗਾ ਯਾਦ ਕਰਦਾ ਨਾਮ ਦਾ ਉਚਾਰਨ ਕਰਦਾ ਜੀ ਗੁਰਬਾਣੀ ਪੜ੍ਹਦਾ ਤਾਂ ਨਾਲ ਦੀ ਨਾਲ ਰੰਗ ਵੀ ਚੜਦਾ ਫਿਰ ਉਹਨੂੰ ਪਰੰੰ ਤੁਸੀਂ ਗੁਰਬਾਣੀ ਸਾਰੀ ਪੜ੍ਹਦੇ ਨੇ ਰੰਗ ਘਾਤਾ ਸਵਾਲ ਇਹ ਗੁਰਬਾਣੀ ਦਾ ਪਾਠ ਕਰਦੇ ਨੇ ਰੰਗ ਨਹੀਂ ਚੜਦਾ ਰੰਗ ਚੜਨਾ ਚਾਹੀਦਾ ਤਾਂ ਪਾਠ ਕਰਨ ਦਾ ਰੰਗ ਸਿਉ ਗੁਰਬਾਣੀ ਦੇ ਰੰਗ ਚ ਰੰਗਿਆ ਜਾਵੇ ਨਾਮ ਦੇ ਰੰਗ ਚ ਰੰਗਿਆ ਜਾਵੇ ਪਾਠ ਕਰਦਾ ਕਰਦਾ ਫਿਰ ਐਸਵਾਦ ਪਾਠ ਕਰਦਾ ਠੀਕ ਹੈ ਜੀ ਨਹੀਂ ਤਾਂ ਫਿਰ ਪੜ ਪੜ ਘੱਡੀ ਲੱਤੀਏ ਫਿਰ ਪੜ ਪੜ ਘੱਡੀ ਲੱਤੀਏ ਕੱਟੇ ਜਾਂਦੇ ਨੇ ਜਿਹੜੇ ਚਿੰਤਾ ਦੇ ਸਾਰੇ ਚਿੰਤਾਵਾਂ ਮੇਲੇ ਜਾਂਦੀਆਂ ਨੇ ਧੰਨ ਧੰਨ ਸੁਹਾਵਾ ਸਰੀਰ ਥਾਨ ਹੈ ਜਿੱਥੇ ਮੇਰਾ ਗੁਰਧਰੇ ਵਿਖਾ ਉਹ ਸਰੀਰ ਵੀ ਤਨ ਤੰਦ ਉਹ ਹਿਰਦਾ ਥਾਨ ਹਿਰਦੇ ਨੂੰ ਕਿਹਾ ਹੋਇਆ ਹੈ ਪਹਿਲਾਂ ਤਾਂ ਬਾਹਰ ਦਾ ਸਰੀਰ ਹੈ ਸੁਖਾ ਫਿਰ ਉਹਦੇ ਥਾਨਾਂ ਹਿਰਦਾ ਉਹ ਸਰੀਰ ਦਾ ਜਿਹੜਾ ਹਿਰਦਾ ਉਹ ਤਨ ਤੰਦ ਥਾਨ ਜਗਾ ਹੈ ਵਿੱਤੇ ਮੇਰੇ ਸਤਗੁਰ ਨੇ ਆਪਣਾ ਆਪਾ ਰੱਖ ਦਿੱਤਾ ਜਿੱਥੇ ਨਾਮ ਪ੍ਰਗਟ ਹੋ ਗਿਆ ਪਗਤ ਕੇ ਮਨ ਵਿਚ RAM ਸੁਖਮਣੀ ਸੁਖ ਉਨਰਤ ਨਾਮ ਪਗਤ ਜਨਾ ਦੇ ਮਨ ਨਾਮ ਨੇ ਵਿਸ਼ਰਾਮ ਕਰ ਲਿਆ ਜਿੱਥੇ ਨਾ ਵਿਸ਼ਰਾਮ ਕਰ ਲਿਆ ਉਹ ਧਨ ਧਨ ਧਨ ਉਹ ਸਰੀਰ ਧਨ ਧਨ ਹਾਂਜੀ ਠੀਕ ਹੈ ਜੀ ਅੱਥਕੇ 19ਵੀਂ ਪੌੜੀ ਸਮਾਪਤੀ ਹੈ ਜੀ ਜੀ